ਸ਼ਲੋਕ ਮਹੱਲਾ ਤੀਜਾ ਉਨਵ ਉਨਵ ਆਇਆ ਅਵਰ ਕਰੇਂਦਾ ਵਨ ਕਿਆ ਜਾਣਾ ਤਿਸ ਸਾਹ ਸਿਉ ਰਹਸੀ ਰੰਗ ਉਨਵ ਉਨਵ ਆਇਆ ਆਂਗਾ ਚੜਕੇ ਅੰਦਰੋਂ ਫੇਰ ਖਿਆਲ ਹੋ ਰਹੇ ਨੇ ਉਹ ਬੱਦਲਾ ਵਾਂਗੂ ਖਿਆਲ ਉੱਠਦੇ ਨੇ ਅੰਦਰੋਂ ਆਪੇ ਹੀ ਆਇਆ ਅਬਰ ਕਰੇ ਤਾਂ ਫਾਲਤੂ ਰੂਪ ਹੋ ਰਹੀ ਹੈ ਹੋਰ ਰੂਪ ਤੋਂ ਹੋਰ ਅਕਲ ਤੋਂ ਗੱਲ ਕਰੂਗਾ ਹੋਰ ਤਰ੍ਹਾਂ ਦੀ ਬਰਖਾ ਪਾਊਗਾ ਕਿਆ ਜਾਣਨਾ ਇਸ ਸਾਹ ਸਿਆਂ ਕੀ ਜਾਣਨਾ ਉਸ ਆਰੂ ਜਿਹੜਾ ਭੇਜਦਾ ਕੇਵ ਰਹਿਸੀ ਰੰਗ ਮੈਂ ਕੀ ਜਾਣਾਂ ਕਿਹੜੇ ਰੰਗ ਚ ਦੇਣਾ ਚਾਹੁੰਦਾ ਹੈ ਉਹਦੇ ਹੱਥ ਨੂੰ ਲਾ ਉਹਦੇ ਰੰਗ ਨੂੰ ਮੈਂ ਨਹੀਂ ਜਾਣ ਸਕਦਾ ਮੇਰਾ ਵਸਲੀ ਜਾਣ ਲੈਣਾ ਉਹਦੇ ਰੰਗ ਦੇ ਕਿਹੜਾ ਰੰਗ ਹੁਣ ਕਿਹੜੇ ਰੰਗ ਤੇ ਰੁਕੂਗਾ ਹੁਣ ਕਿਹੋ ਜਿਹਾ ਰਕਦੀ ਗੱਲ ਕਰੂਗਾ ਹੁਣ ਹੋਰ ਰੂਪ ਨਾਲ ਗੱਲ ਕਰਦੀ ਐ ਪਹਿਲਾਂ ਹੋਰ ਅੰਗਲ ਤੋਂ ਗੱਲ ਕਰੀ ਐ ਦਾ ਪਾਵ ਹੈ ਰੂਪ ਆ ਗਿਆ ਹੋਰ ਰੂਪ ਤੋਂ ਗੱਲ ਕਰੂ ਹੋਰ ਅੰਗਲ ਤੋਂ ਗੱਲ ਕਰੂਗਾ ਦਰਸ਼ਕ ਤੇ ਹੋਰ ਰੂਪ ਦਾ ਉਹ ਗੱਲ ਉਹੀ ਹੋਊ ਕਿਆ ਜਾਣਾਂ ਤੇ ਸ਼ਾਸਿਉ ਕੇਵ ਰਹਸੀ ਰੰਗ ਅਕੱਲ ਰੰਗ ਕਿਆ ਉਹ ਜਿਹੜੇ ਰੰਗ ਚ ਖੜਾ ਹੁੰਦਾ ਉਸੇ ਰੰਗ ਦੀ ਗੱਲ ਕਰਦਾ ਹੈ। ਅੱਛਾ ਜੀ ਇਹ ਹੁਣ ਇੱਥੇ ਅਜੇ ਗੱਲ ਮਨੋਰਚਿਤ ਨਹੀਂ ਹੋ ਰਹੀ ਹੈ ਜੀ। ਕੋਈ ਨਹੀਂ ਬੋਲਦੀ ਆ ਬੁੱਧੀ ਗੱਲ ਕਰ ਰਹੀ ਹੈ। ਕਹਿੰਦੀ ਬੁੱਧੀ ਕਲਿਓ। ਤੇ ਆਪਣੇ ਮੂਲ ਬਾਰੇ ਕਹਿ ਰਹੀ ਹੈ ਜੀ। ਹਾਂ। ਅੱਛਾ ਕੇਵਰ ਹੈਸੀ ਰੰਗ ਤੋਂ ਕੀ ਭਾਵ ਹੈ ਜੀ? ਸਰ ਇਹ ਕੇਸੈਂਕਲ ਤੋਂ ਮਾਰਦਾ ਗੱਲ ਕੱਢ ਕੇ ਕਹਿੰਦੇ ਕੇਸੈਂਕਲ ਤੋਂ ਮਾਰਦਾ। ਇਹ ਬੁੱਧੀ ਚੇਤਨ ਨਾਲ ਗੱਲ ਕਰ ਰਹੀ ਹੈ ਕਿ ਚਿੱਤ ਦਾ ਰਹਿਸ ਪਤਾ ਨਹੀਂ ਲੱਗ ਰਿਹਾ ਬੁੱਧੀ ਨੂੰ ਨਹੀਂ ਕੋਈ ਗੱਲ ਨਹੀਂ ਅੱਛਾ ਜੀ ਹੁਕਮ ਆ ਰਿਹਾ ਹੈ ਉਹਨਾਂ ਨੂੰ ਉਹਦੀ ਨਾ ਪਤਾ ਕਿ ਹੋ ਜਾ ਆ ਜਾਣਾ ਖਿਆਲ ਹੁਕਮਾਂ ਕਹਿੰਦੇ ਪਤਾ ਲੱਗਦਾ ਕਿਹੜੇ ਰੰਗ ਬੋਲਦੇ ਨੇ ਤਾਂ ਹਾਂ ਜੀ ਰੰਗ ਰਹਿਆ ਕਾਮਣੀ ਜਿਨ ਮਨਿ ਭਉ ਭਉ ਹੋਏ ਨਾਨਕ ਭੈ ਭਾਏ ਬਾਹਰੀ ਤਿੰਨ ਤਨ ਸੁਖ ਨਾ ਹੋਏ ਲੰਗ ਰਹਾ ਤਿਲਾਂ ਉਹਨਾਂ ਤਾਂਗੜੀਆਂ ਨੂੰ ਅਸਲ ਦੇ ਵਿੱਚ ਰੰਗ ਚਾੜ ਰਹੇ ਆ ਉਹ ਆਪਣੇ ਰੰਗ ਦੇ ਰੰਗ ਦੇ ਰਿਹਾ ਉਹਨਾਂ ਨੂੰ ਇਹਨਾਂ ਦੇ ਅੰਦਰ ਪੌਅਰ ਪ੍ਰੇਮ ਹੁੰਦਾ ਜਾ ਰਿਹਾ ਔਰ ਪ੍ਰੇਮ ਦੋਏ ਹੁੰਦੇ ਨਾ ਜਿਹਨੂੰ ਰੰਗ ਦੀ ਲੋੜ ਹੁੰਦੀ ਆ ਉਹਨਾਂ ਨੂੰ ਰੰਗ ਚਾੜ ਰਹੇ ਇਸ ਕਰਕੇ ਪਤਾ ਨਹੀਂ ਕਿਹੜਾ ਕਿਹੜਾ ਕਿਵੇਂ ਕਿਵੇਂ ਰੰਗ ਦੇ ਰਹੇ ਆ ਰੰਗ ਸਾਰੇ ਹੀ ਪਾ ਦੇਣੇ ਨੇ ਰੰਗੇ ਕੋਰੇ ਨੇ ਕੋਈ ਕਲਮੀ ਚ ਸਾਰੇ ਹੀ ਰੰਗ ਨੇ ਉਸ ਆਪ ਨਾ ਉਹ ਹਾਂਜੀ ਜਿੰ ਮਨੀ ਭਾਉ ਭਾਉ ਹੋਈ ਜਿੱਦਾਂ ਨਾ ਮਨ ਭੋ ਵੀ ਐ ਕੋਪ ਵੀ ਐ ਹੁਕਮ ਚ ਰੰਨਾ ਭਾਉ ਐ ਭਾਉ ਭੁੱਖ ਐ ਤੇ ਜਿਹੜੀ ਨਾ ਭੁੱਖ ਵੀ ਐ ਬਾਹਰੀ ਤਿੰਨ ਤਨ ਸੁਖ ਨਾ ਹੋਏ ਨਾਨਕ ਅੰਦਰ ਜੀਵਨ ਦੇ ਭੈੜੀ ਹੈ ਪਹਿਲਾਂ ਨਾਲ ਦੀਆਂ ਹੁਕਮ ਦੇ ਵਿੱਚੇ ਭੁੱਖ ਵੀ ਨਹੀਂ ਹੈ ਇਹ ਤਾਂ ਬਾਹਰ ਦੇ ਲੋਏ ਸੁਖ ਨਾ ਹੋਏ ਉਹਨੂੰ ਕੋਈ ਫਰਕ ਨਹੀਂ ਪੈਂਦਾ ਜਿੱਡੀ ਮਰਜ਼ੀ ਗੁਰਬਾਣੀ ਦਾ ਪ੍ਰਚਾਰ ਹੋਈ ਜਾਵੇ ਜਿੰਨਾ ਮਰਜ਼ੀ ਸਹੀ ਕਰੀ ਜਾਵੇ ਗੁਰੂਆਂ ਦਾ ਭਗਤ ਕਵੀ ਆਪ ਆ ਕੇ ਕਰੀ ਜਾਵੇ ਗੁਰੂ ਕੇ ਸਾਰੇ ਆਪ ਆ ਕੇ ਕਰੀ ਜਾਣ ਔਰ ਦੁਨੀਆ ਨੂੰ ਫਰਕ ਪੈਂਦਾ ਨਹੀਂ ਤੇ ਕੋਈ ਅਸਲ ਨਹੀਂ ਪੈਂਦਾ एथे भी प्रेम ਦੀ ਔਰ ਭੁੱਖ ਦੀ ਉਹ ਗੱਲ ਹੈ ਜੀ ਨਾਨਕ ਭੈ ਭੈ ਬਾਹਰੀ ਹਾਂ ਬਾਹਰੀ ਅਸ ਜਿਹੜੀਆਂ ਦੋ ਚੀਜ਼ਾਂ ਤੋਂ ਬਾਹਰ ਨੇ ਉਹਨਾਂ ਤੇ ਕੋਈ ਅਸਰ ਨਹੀਂ ਪੈਂਦਾ ਗੁਰਬਾਣੀ ਆਹ ਤੇ ਜਲਦੀ ਹੈ ਉੱਥੇ ਇੱਕ ਬੂਦ ਕੀ ਕਰੂਗਾ ਹਾਂ ਜੀ ਮਹੱਲਾ ਤੀਜਾ ਉਨਵ ਆ ਜਿਹਨਾਂ ਪਾਗਲ ਲਵਰ ਫੇਰੇ تھے ਕਿ ਪਾਗਲ ਲਵਰ ਨੂੰ ਨੇ ਉੱਤੇ ਕਿਵੇਂ ਬਦਲਦਾ ਪਾਗਲਾ ਸਿੱਧਾ ਲਵਰ ਇੱਥੇ ਵੀ ਆਇਆ ਹੋਇਆ ਹੈ ਨੇ ਉਡਾ ਦੇਣਾ ਸੀ ਵਿੱਚੋਂ ਜਿਹੜੀ ਦਾਲ ਹੈ ਨਾਲ ਦਾ ਕਨਸੈਪਟ ਉਡਾਉਣਾ ਸੀ ਉਹਨੂੰ ਸੂਤ ਨਹੀਂ ਹੁੰਦਾ ਹਾਂਜੀ ਉਹਨ ਉਹਨ ਵ ਆਇਆ ਪਰ ਆ ਝੋਕ ਕੇ ਆਇਆ ਬਦਲ ਗਿਆ ਬਿਲਕੁਲ ਪੂਰੇ ਝੋਲ ਨਾਲ ਪਰਛਾਹ ਹੋਈ ਲਪਮ ਦੇ ਨੀਰ ਵਰਸਿਆ ਅੱਤ ਨਿਰਮਲ ਨੀਰ ਵਰਸਿਆ ਅੱਤ ਨਿਰਮਲ ਗੱਲ ਨਾਨਕ ਦੁਖਲਾ ਕਾ ਤਨ ਜਿਹੜੇ ਹੁਲ ਤੇ ਕੰਕ ਜਿਹਨੂੰ ਇੱਛਾ ਮਾਇਆ ਦੀ ਸੀ ਉਹਨੂੰ ਬੜਾ ਦੁੱਖ ਲੱਗਿਆ ਜਿਨ੍ਹਾਂ ਦੀ ਦੁਕਾਨਦਾਰੀ ਚੱਲਦੀ ਸੀ ਝੂੜਤੇ ਉਹਨਾਂ ਨੂੰ ਬੜਾ ਦੁੱਖ ਲੱਗਿਆ ਸੱਚ ਜੋ ਪ੍ਰਗਟ ਹੋ ਗਿਆ ਦੁਖਲਾ ਕਾ ਜਦ ਕੱਲ ਤੇ ਸਾਨੂੰ ਨੇ ਪੱਕ ਜਿਹਨਾਂ ਦਾ ਮਨ ਸੱਚ ਨਾਲੋਂ ਪੰਕ ਸੀ ਨਾ ਜਿਹੜੇ ਨਹੀਂ ਸੀ ਚਾਹੁੰਦੇ ਸੱਚ ਪ੍ਰਗਟ ਹੋ ਜਵੇ ਜਿਹਨੂੰ ਸੱਚ ਦੇ ਪ੍ਰਗਟ ਹੋਣ ਤੋਂ ਸੱਚ ਸੁਣਨ ਤੋਂ ਅਲਰਜੀ ਸੀ ਉਹਨੂੰ ਬੜਾ ਦੁੱਖ ਹੋਇਆ ਠੀਕ ਹੈ ਜੀ ਉਹਨਾਂ ਦੇ ਮਨ ਭੰਗੇ ਰਹੇ ਮਨ ਅਰਚਿਤਕ ਨਹੀਂ ਹੋਏ ਹਾਂ ਜਿਹੜੇ ਮੂਰਤੀਆਂ ਜੋ ਦਰਸ਼ਨ ਕਰਾਉਂਦੇ ਸੀ ਉਹ ਕਿੰਨੂੰ ਬਰਦਾਸ਼ਤ ਕਰ ਲੈਂਦੇ ਤੇ ਕੱਲ ਸਵਾ ਹੋ ਗਿਆ ਉਹਨਾਂ ਦਾ ਗਰੀ ਖਤਮ ਹੋ ਗਿਆ ਹੁਣ ਉਹੀ ਮੂਰਤੀਆਂ ਦੇ ਦਰਸ਼ਨ ਕਰਾਉਣ ਹੋਰ ਤਰ੍ਹਾਂ ਦੇ ਪਾਠ ਅਲੱਗ-ਅਲੱਗ ਪਾਠਾਂ ਦੀਆਂ ਕਿਸਮਾਂ ਲੈ ਕੇ ਹੁਣ ਗੁਰਮਤਿ ਜੀ ਸਿੱਖ ਧਰਮ ਚ ਆ ਗਏ ਜਾਦੂਗਰ ਜਿਹੜਾ ਫੇਲ ਹੋ ਜਾਂਦਾ ਉਹਨਾਂ ਦਾ ਤਰੀਕਾ ਲੱਭ ਲੈਣਾ ਜੀ ਪੌੜੀ ਤਰਫਾ ਉਪਾਏ ਇੱਕ ਵਰਤਿਆ ਵੇਦ ਬਾਣੀ ਵਰਤਾਏ ਅੰਦਰਵਾਦ ਘੱਟਿਆ ਦੋਵੇਂ ਤਰਫਾ ਉਪਾਏ ਦੋੇ ਤਰਫਾਂ ਪਹਿਲਾਂ ਕੀਤੀ ਉਹ ਕੀ ਸਾਫ਼ ਔਰ ਤਾਂ ਆਪਕੋ ਨੇ ਦੋ ਦੋ ਪਾਈ ਦੋਹੂ ਬਿਲਕੁਲ ਸਿੱਸੇ ਪਾਈ ਪਹਿਲਾਂ ਹੀ ਦੋ ਤਰਫਾਂ ਨੇ ਪੈਦਾ ਕੀਤੀਆਂ ਨੇ ਆਪਾਂ ਵਿਰੋਧੀ ਤੋਂ ਤਰਫਾਂ ਪਾਏ ਇੱਕ ਵਰਤੇ ਆਪ ਇੱਕ ਹੋ ਕੇ ਵਰਤੇ ਵਿਚਾਰੇ ਆਪ ਨਹੀਂ ਦੋ ਰਹੇ ਆਪ ਇੱਕ ਹੋ ਕੇ ਵਰਤੇ ਪੇਦਵਾਣੀ ਵਰਤਾਏ ਆ ਦੇਖੋ ਸਿੱਧੀ ਬੇਦਵਾਣੀ ਲਿਖਿਆ ਹੈ ਉਹ ਗੁਰਬਾਣੀ ਬੇਦਵਾਣੀ ਹੋਈ ਹੈ ਬੇਦਵਾਣੀ ਵਰਤਾਏ ਹੁਣ ਗੁਰਬਾਣੀ ਵਰਤਾਤੀ ਵਰਤਾਈ ਦਰਵਾਜ਼ਾ ਘੱਟਿਆ ਅੰਦਰ ਬਾਤ ਘੱਟਿਆ ਬੰਦੇ ਨੂੰ ਮੰਦਾ ਨਹੀਂ ਤੇਤ ਮੰਦਾ ਵੇਦਮਾਨੀ ਵੀ ਵਰਤਾਈ ਹੋਈ ਹੈ ਇਹਦੇ ਤੇ ਬਾਤ ਵੀ ਹੈ ਉਸ ਵੇਲੇ ਤੇ ਸ਼ਾਸਤਰ ਬੁਲਦੇ ਨੇ ਉਹ ਕਹਿੰਦੇ ਨੇ ਪੁੰਨ ਪਾਪ ਹੈਗਾ ਵੇਦ ਕਹਿੰਦਾ ਪੁੰਨ ਪਾਪ ਹੈਗਾ ਜਿਹੜੇ ਪੁੰਨ ਪਾਪ ਹੈਗਾ ਨਹੀਂ ਹੈਗਾ ਬੁਲਦੇ ਨੇ ਉਹ ਕਹਿੰਦੇ ਮਾਸਗਾਣਾ ਪਾਪ ਹੈ ਜਿਹੜੇ ਪੁੰਨ ਪਾਪ ਬੁਲਦੇ ਨਹੀਂ ਉਹ ਕਹਿੰਦੇ ਪਾਪ ਹੈ ਜੀ ਕੁਝ ਪੁੰਨ ਪਾਪ ਹੁੰਦਾ ਹੀ ਨਹੀਂ ਪਾਪ ਤਾਂ हमरे ਬਸ ਨਹੀਂ ਗੁਰਬਾਣੀ ਇਹ ਕਹਿੰਦੀ ਹੈ ਆਵਾਜ਼ ਹੈ ਉਹ ਆਦਮ ਉਹ ਕਾਜ਼ਰ ਗੁਰ ਗੁਰਦਾ ਗੁਰਮੁਖ ਵੇਤ ਤੇ ਡੀ ਖੜੇ ਗੁਰਮੁਖ ਕਪੜੀ ਵਰਜੀ ਤੇ ਖੜੇ ਨੇ ਗੁਰਮੁਖ ਸਚਾਰ ਨੂੰ ਸੱਚ ਕਰਕੇ ਬੰਦੇ ਨੇ ਗੁਰਮੁਖ ਇਹਨੂੰ ਸੁਪਨਾ ਕਰਕੇ ਦਿੰਦੇ ਨੇ ਬਾਤ ਤਾਂ ਰਹਿਣੀ ਇੱਕ ਸੰਸਾਰ ਨੂੰ ਸੱਚ ਬੰਦਦਾ ਹੈ ਸੰਸਾਰ ਨੂੰ ਸੁਪਨਾ ਦਿੰਦਾ ਹੈ ਇਹ ਤਾਂ ਬਾਜ਼ ਰਹੁ ਜਦੋਂ ਲਿਖਿਆ ਦੋਵੇਂ ਤਰਫਾਂ ਉਪਾਏ ਇੱਕ ਵਰਤਿਆ ਇੱਕ ਤੋਂ ਕੀ ਭਾਵ ਹੈ ਜੀ ਆਪ ਕੋਹ ਕੀ ਵਰਤੇ ਆ ਆਪ ਕੀ ਦੀ ਗੱਲ ਕਰ ਰਹੇ ਆ ਆਪਾ ਕਿਹਦੇ ਉਪਾਇ ਦੇ ਪਵ ਸਾਗਰ ਚ ਦੋ ਤਰਫਾ ਸੱਚਖੰਡ ਚ ਇੱਕ ਤਰਫੇ ਹੀ ਹਾਂਜੀ ਸੱਚਖੰਡ ਅੱਛਾ ਜੀ ਬੇਦਬਾਨੀ ਉਹਨਾਂ ਨੇ ਸੱਚਖੰਡ ਨੇ ਫੇਰ ਵੀ ਵਾਦ ਜਿਹੜਾ ਹੈਗਾ ਉਹ ਚੱਲ ਰਿਹਾ ਹਾਂਜੀ ਚੱਲ ਰਿਹਾ ਹੋਰ ਕੀ ਹਾਂਜੀ ਪਰ ਵਿਰਤ ਨਿਰਵਿਰਤ ਹਾਠਾਂ ਤੋਹਾ ਵਿੱਚ ਧਰਮ ਫਿਰੇ ਰਹਿ ਬਾਰਿਆ ਮਨਮੁਖ ਕੱਚੇ कूडियार तिनि निहचो दरगाह हारिया परवर्ती कर्म नु डलनाया है वर्ती नु लेना नरवर्ती है जेडी वर्ती है जी वर्ती उखड़ी होई दा न नरवर्ती है मेरे उधर थोड़ी फिरदी है कदे उधर थोड़ी फिरदी है ਦਰਵਰਤੀ ਹਾਠਾਂ ਦੋ ਮਹੀਨੇ ਦੋ ਹੀ ਹਾਠਾਂ ਦੇ ਮੇਰੀ ਮਰਜ਼ੀ ਇੱਕ ਪਰਮੈਸ਼ਨ ਦੀ ਮਰਜ਼ੀ ਜੇ ਕੋ ਪਾਣਾ ਗੁਰਕਾ ਪਰਵਰਤੀ ਹੈ ਦਰਵਰਤੀ ਮੇਰਾ ਪਾਣਾ ਆਪਣਾ ਪਾਣਾ ਹਾਠਾਂ ਦੋ ਵਿੱਚ ਧਰਮ ਫੇਰੇ ਦਾ ਵਿੱਚ ਇਹ ਧਰਮ ਆਪਣੀ ਮਰਜ਼ੀ ਵਾਲੇ ਵੀ ਧਰਮ ਕਰਦੇ ਨੇ ਧਰਮ ਦੇ ਕਰਮ ਉਹਨਾਂ ਨੇ ਵੀ ਧਰਮ ਬੰਨੇ ਹੋਏ ਨੇ ਉਹਨਾਂ ਮਤਾਨੇ ਵੀ ਧਰਮ ਬੰਨੇ ਹੋਏ ਨੇ ਇਹਨਾਂ ਦੇ ਵਿੱਚ ਧਰਮ ਦਾ ਝਗੜਾ ਹੈ ਉਹਨਾਂ ਮਤਾਨਿਆਂ ਦਾ ਧਰਮ ਆਪਣਾ ਮਰਜ਼ੀ ਦਾ ਬਣਾਇਆ ਹੋਇਆ ਇੱਕ ਦੀ ਧਰਮ ਉਹਨਾਂ ਦੇ ਦੇਖਾਂ ਧਰਮ ਦੇ ਆਪਸ ਵਿੱਚ ਹੀ ਲੋੜੇ ਝਗੜੇ ਬਹੁਤ ਨੇ ਧਰਮ ਦੇ ਉਹ ਕਹਿੰਦਾ ਸਾਡੇ ਆਲਾ ਚੰਗਾ ਉਹ ਕਹਿੰਦਾ ਸਾਡੇ ਆਲਾ ਚੰਗਾ ਹੈ ਪਰਵਰਤੀ ਦਾ ਧਰਮ ਕੋਈ ਹੈ ਉਹ ਸਾਰੇ ਉਹਨੂੰ ਸਾਰੇ ਇੱਕ ਦੇ ਉਹ ਸਾਰਿਆਂ ਨੂੰ ਇੱਕ ਪਰਵਰਤੀ ਗੱਲ ਤਾਂ ਆਗਰ ਪਰਵਰਤੀ ਆਲੇ ਧਰਮ ਦੀ ਫੈਸਲਾ ਕਰਾਉਣ ਹੁੰਦਾ ਸਾਰੇ ਧਰਮ ਦਾ ਸਾਰੇ ਧਰਮ ਦੇ ਜਾ ਕੇ ਸਮੂਹ ਨੇ ਤੇ ਸਹਿਮਤ ਹੋਣ ਸਹਿਮਤ ਪਰਵਰਤੀ ਨਾਲੇ ਹੋਣਾ ਪਊਗਾ ਪਹਿਲਾਂ ਲੋੜ ਪੈ ਲੈਣੇ ਜੀ ਕੱਕ ਟੱਕ ਲੈਣ ਨੂੰ ਫੇਰੇਤੀ ਆ ਜਾਂਦੇ ਹੁੰਦੇ ਹਾਂ ਜੀ। ਹਾਂਜੀ। ਪ੍ਰਵਿਰਤੀ ਨਿਰਵਿਰਤੀ ਹਾਠਾਂ ਦੋਵੇਂ ਕਹਿੰਦਾ ਭਾਵ ਦੋਹਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ ਜੀ। ਨਹੀਂ ਦੋ ਕਿਨਾਰੇ ਸਾਡੀ ਵੀ ਉਪਦੇਸ਼ ਕਰਦੇ ਅੱਛਾ ਜੀ ਵਿਚ ਧਰਮ ਫਿਰੇ ਰਹਿ ਬਾਰਿਆ ਤੇ ਧਰਮ ਕਿੱਥੇ ਹੈ ਜੀ ਫਿਰ ਇਹਨਾਂ ਦੋਹਾਂ ਦੇ ਵਿਚਾਲੇ ਹੈ। ਵਿਚਾਲੇ ਜਾਂ ਫੁੱਟਬਾਲਾਂ ਨੇ ਬੱਟਾ ਉਧਰ ਨੂੰ ਮਾਰਤਾ ਉਧਰ ਨੂੰ ਮਾਰਤਾ ਐਵੇਂ ਕਰਦਾ। ਉਹ ਧਰਮ। ਪਰਵਰਤੀ ਵਾਲੇ ਉਹ ਕਹਿੰਦੇ ਨੇ ਆਏ ਤਾਨੂੰ ਰਹਿ ਬਾਹਰਿਆ ਕੀ ਪਪ ਹੁੰਦਾ ਜੀ ਰਹਿੰਦਾ ਟਰਬ ਤੋਂ ਭਜਦੇ ਦੋ ਹੀ ਦੀਰ ਧਰਮ ਨਹੀਂ ਪਤਾ ਉਹ ਵੀ ਕਹਿੰਦੇ ਅਸੀਂ ਸਹੀ ਆ ਜਿਹਨਾਂ ਨੂੰ ਪਤਾ ਉਹ ਤਾਂ ਹੈ ਹੀ ਸਹੀ ਪਤਾ ਹੈ ਜੀ ਸਹੀ ਮਨਮੁਖ ਕੱਚੇ ਕੂੜਿਆਰ ਤੇਰੀ ਨਿਛੋ ਦਰਗਾਹ ਹਾਰਿਆ ਜਿਹੜੇ ਮਨਮੁਖ ਨੇ ਕੱਚੇ ਤੇ ਕੂੜਿਆਲ ਦੇ ਕੇ ਹੀ ਤੇਰੀ ਦਰਗਾਹ ਚੋਂ ਨੇ ਹਾਰ ਚਲਦੇ ਸੱਚ ਜਦ ਗੱਲ ਚਲਦੀ ਹੈ ਸਿਰੋ ਚੁੱਪ ਹੋ ਜਾਂਦਾ ਕਰਕੇ ਦਰਵਾਜ਼ੇ। ਕਹਿੰਦੇ ਪੈਸੇ ਬਦਲਦੇ ਰਹਿੰਦੇ ਨੇ ਤੁਸੀਂ ਕਹੋ ਭਾਈ ਪੁੱਤ ਬਾਪ ਜੇ ਹੈਗਾ ਤੇ ਸ਼ਿਵ ਜੀ ਦੀ ਪੂਜਾ ਕਰਦੇ ਕਰਦੇ ਉਹ ਪਾਪੀ ਤਾਂ ਸਭ ਤੋਂ ਵੱਡਾ ਉਹ ਹੈ ਛੇਵੀਂ ਬੁਗਾਰ ਸਾਰਿਆਂ ਨੂੰ। ਨਹੀਂ ਜੀ ਨਹੀਂ ਉਹਨੂੰ ਪਾਪ ਨਹੀਂ ਲੱਗਦਾ। ਚਲੋ ਬਿੱਲੀ ਚੂਹਾ ਮਾਰਦੀ ਹੈ, ਗੁਰੂ ਬਾਪ ਉਹਨੂੰ ਵੀ ਨਹੀਂ ਲੱਗਦਾ ਪਾਪ। ਜੇ ਤੇ ਦਾਲੀਆਂ ਅੰਨ ਕੇ ਜੀਵ ਹੈ ਨਾ ਕੋਏ, ਇਹ ਵੀ ਜੀ ਤੇ ਆਪਾਂ ਅੰਨ ਕੇ ਖਾਣਾ ਨਹੀਂ ਉਹ ਵੀ ਠੀਕ ਹੈ। ਐ ਜੇ ਪੈਸੇ ਬਦਲਦੇ ਨੇ। ਪਾਪ ਕਰੀ ਵੀ ਜਾਂਦੇ ਨੇ ਪਾਪ ਨੂੰ ਬੋਲਦੇ ਵੀ ਹਾਂਜੀ ਗੁਰਮਤਿ ਸ਼ਬਦ ਸੂਰ ਹੈ ਕਾਮ ਕ੍ਰੋਧ ਉਪਦੇਸ਼ ਹੈ ਇਹ ਸੂਰ ਹੈ ਇਹ ਸੂਰ ਜੇ ਤੂੰ ਬਾਬਾ ਜੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨ ਮਾਰਿਆ ਜਿਹਨੇ ਆਪਣੀ ਕਾਮਨਾ ਇੱਛਾ ਮਾਲ ਲਈ ਕ੍ਰੋਧ ਮਾਲ ਲਿਆ ਉਹ ਸੂਰ ਹੈ ਇੱਛਾ ਦਾ ਕ੍ਰੋਧ ਉਹਨਾਂ ਦੇ ਮਰਦਾ ਨਹੀਂ ਹਰਮੁਕ ਬਣੇ ਫਿਰਦੇ ਇੱਛਾ ਦਾ ਹੋਰ ਬਦਾਲੀ ਖਾਲਸਾ ਨਾਲੋਂ ਅਸਲ ਬੋਲ ਕਹਿੰਦੇ ਅਸੀਂ ਸਾਰੇ ਸੁਖਾਣਾ ਇਹ ਤੂੰ ਕਹਿੰਦੇ ਹਿੱਤਤ ਬਣਾਉਣੇ ਕਿਤੇ ਆਪਣੇ ਆਪਣੇ ਖਬਰੇ ਦਾ ਸਾਇ ਕਰਿੰਗ ਫਿਰਦੇ ਨੇ ਘਟ ਗੌਰ ਠੀਕ ਹੈ ਸ਼ਬਦ ਹੈ ਅਸਲ ਚ ਉਹੀ ਸੂਰਾ ਹੈ ਹਾਰੇ ਹੋਏ ਹਨ ਜੀ ਉਹ ਆਪਣਾ ਜਤਨਾ ਜੀ ਲੋਕਾਂ ਨੂੰ ਕਾਹਦਾ ਜਤਨਾ ਆਪੀ ਹਾਂ ਜੀ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਤੁਧ ਭਾਮ ਦੇ ਸੱਚੇ ਨਾਏ ਪਿਆਰੇ ਉਹ ਜਿਹੜਾ ਆਪਣੇ ਹਿਰਦੇ 'ਚ ੱਕੇਆ ਸੱਚੇ ਸ਼ਬਦ ਦੇ ਮਹਿਲ ਦੇ ਵਿੱਚ ਉਹਨੂੰ ਸਵਾਰਤਾ ਸਾਰਾ ਹੀ ਘਟਤਾ ਉਹਦੇ 'ਚ ਸਾਰੀ ਬੁਰਾਈ ਬਾਹਰ ਕੱਢਤੀ ਤੇ ਭਗਤ ਤੁਧ ਭਾਮ ਦੇ ਸੱਚੇ ਨਾਏ ਪਿਆਰੇ ਐਸੇ ਹੀ ਭਗਤ ਤੈਨੂੰ ਪਾਉਂਦੇ meri bhook hai tere darshan di है hai ji dil di osi tainu chande landa haan ji satguru sevan apna tina vittu ho vaarya jehde apna satguru di seva karde ne teno vittu ho vaarya apna ਜੋ ਸਾਧੂ ਕਹਿੰਦੇ ਉਹ ਮੰਨਦੇ ਨੇ ਉਹ ਕਰਦੇ ਨੇ ਉਹਨਾਂ ਤੋਂ ਬਿਨ ਕੁਰਬਾਨ ਜੀ ਹਾਂਜੀ ਇੱਥੇ ਪੰਜਵੀਂ ਪੌੜੀ ਸਮਾਪਤੀ ਹੈ ਜੀ